ਪਰੀਦਾ ਕਾਲੀ ਜੀ ਨਾ 라ਵਿਆ ਧੌਲੀ 라ਵੈ ਕੋਏ ਕਰ ਸਾਈਂ ਸਿਨ ਪਿਰਹੜੀ ਰੰਗਨ ਵਿਲਾ ਹੋਏ ਫਰੀਕਾ ਕਾਲੀ ਜੀ ਨਾ 라ਵਿਆ ਜਦੋਂ ਕਾਲੇ ਕੇਸ ਹੁੰਦੇ ਨੇ ਬਚਪਨ ਜੀਦਾ ਬਚਪਨ ਤੇ ਘਰ ਬਲ ਧਿਆਨ ਨਾ ਹੋਵੇ ਤਾਂ ਟੋਲੇ ਆਉਣ ਤੇ ਬਾਅਦ ਕੋਈ ਬਿਰਲਾ ਹੀ ਜਾਂਦਾ ਫਿਰ ਉਧਰ ਕੋਈ ਬਿਰਲਾ ਜਾਂਦਾ। ਤੋ ਵੀ ਕੋਈ ਕੋਈ ਕੋਈ ਬਿਰਲਾ। ਕਿਾ ਆ ਸਕਦਾ। ਪਰ ਕੋਈ ਬਿਰਲਾ ਜਾਂਦਾ। ਉਹਦੇ ਅਫਤਰ ਹੁੰਦਾ ਹੈ। ਕੋਈ ਮਿਲਿਆ ਹੁੰਦਾ ਦੀ ਸੰਗਤ ਤੇ ਵੀੜੀ ਹੁੰਦੀ। ਜਦ ਸੰਗਤ ਮਿਲ ਜਵੇ ਫਿਰ ਪੜ ਜਾਂਦਾ। ਸੰਕਤ ਨੇ ਵੀ ਗੱਲੇ ਨਹੀਂ ਸੁਣੀਆਂ ਕੋਈ ਐਸਾ ਵੀ ਆ ਟੋਲੇ ਆਇਆ ਤੇ ਵੀ ਫਕਤੀ ਵੱਲ ਨੂੰ ਮੋੜ ਕੱਟ ਸਕਦਾ ਸੱਚ ਵੱਲ ਨੂੰ ਮੋੜ ਦੁਨੀਆ ਤੋਂ ਤਲਾਕ ਦੇ ਸਕਦਾ ਦੁਨੀਆ ਦੀ ਰੇਸ ਚੋਂ ਮਾਇਆ ਦੀ ਰੇਸੋਂ ਪਿੱਛੇ ਛੋੜ ਸਕਦਾ ਕਰ ਸਾਇੰਸੋਂ ਪਰਹੜੀ ਪਰ ਤੂੰ ਤੈਨੂੰ ਕੀ ਆ ਤੂੰ ਤਾਂ ਉਹਨਾਂ ਦੇ ਵਿੱਚ ਹੈ ਨਹੀਂ ਤੂੰ ਤਾਂ ਕਾਲਿਆਂ ਤੇ ਲੱਗਦਾ ਰਿਹਾ ਹੈ ਤੂੰ ਤਾਂ ਕਾਲਿਆਂ ਤੇ ਜਪਦਾ ਰਿਹਾ ਨਾ ਤੂੰ ਤਾਂ ਕਾਲਿਆਂ ਹੁੰਦੇ ਰਿਹਾ ਬਚਪਨ ਤੋਂ ਹੀ ਲੱਗਿਆ ਰਿਹਾ ਪਰ ਤੂੰ ਸਾਈਨ ਆਉਟ ਪ੍ਰੇਮ ਰੱਖ ਪਰੜੀ ਹੁੰਦਾ ਪ੍ਰੇਮ ਪਰ ਸਾਈਂ ਪ੍ਰੇਮ ਰੱਖ ਅਪਰਾਣ ਤੇਰਾ ਨਾਮ ਸੰਸਾਰ ਨਾਲੋਂ ਵੱਖਰਾ ਹੋ ਤੇਰੇ ਕੋਲ ਵੱਖਰੀ ਕਿਸਮ ਦਾ ਗਿਆਨ ਹੋਵੇ ਸੰਸਾਰ ਜੋ ਨਾ ਤੇਰਾ ਰੰਗ ਹੈ ਨਾ ਤੈਨੂੰ ਰੰਗ ਚੜਿਆ ਦਾ ਉਹ ਸੰਸਾਰੀ ਰੰਗਾਂ ਤੋਂ ਵੱਖਰਾ ਹੋਵੇ ਉਹ ਨੌ ਨਦੇ ਅੰਮ੍ਰਿਤ ਪ੍ਰਭ ਨਾਮ ਹੋਵੇ ਨਾ ਖਜਾਨਾ ਹੋਵੇ ਤੇਰੇ ਕੋਲ ਗਿਆਨ ਦਾ ਤੇਰੇ ਕੋਲ ਗਿਆਨ ਦਾ ਖਜਾਨਾ ਨਮਾ ਨਵੇਂ ਰੰਗ ਹੋ ਰਹੇ ਨਮੀ ਹੋ ਗੱਲ ਆਹੋ ਦੋ ਵੀਓ ਵਿਚਾਰਤਾ ਰਹੇ ਹੋ ਹਾਂਜੀ <gülüyor> <gülüyor>